ਇਕ ਓਅੰਕਾਰ ਸਤਿਗੁਰ ਪ੍ਰਸਾਦਿ ਆਦਿ ਰਾਮ ਕਲੀ ਪਾਤਸ਼ਾਹੀ 10ਵੀਂ ਰੇ ਮਨ ਐਸੋ ਕਾਇ ਸੰਨਿਆਸਾ ਬਾਂਸੇ ਸਦਨ ਸਵਾ ਕਾਲੇ ਸਮਝਾਓ ਮਨ ਹੀ ਮਾਹਿ ਉਦਾਸਾ ਰਹਾਓ ਜਤਕੀ ਜਟਾ ਜੋ ਕੋ ਮੱਜਨ ਨੀਮ ਕੇ ਨਖਨ ਬਡਾਓ ਗਿਆਨ ਗੁਰੂ ਆਤਮ ਉਪਦੇਸਾ ਨਾਮ ਵਿਪੂਤ ਲਗਾਓ ਅਲਪਹਾਰ ਸੁਲਪਸੀ ਨਿੰਦਰਾ ਦਇਆਸ਼ੀਮਾ ਤਨਪ੍ਰੀਤ ਸੀਲ ਸੰਤੋਖ ਸਦਾ ਨਿਰਵਾਹਿ हवैबू तिरगुण अतीत काम क्रोध अहंकार लोभ हाठ मोह न मनसु ली तभी आत्म तत्को दरसै परम पुरुष का पावे रामकली पास से दशमी रे मन ए विध योग कमाओ सिंगी साच कपट कंठला ध्यान विभूत चढ़ाओ रहओ ताती गौ आत्म बसे करकी पिछा नाम आधारंग बाजे परम तार तत् हरि को उपजाय राग रे ओकुटाय तान तिरंग रंगे अति ज्ञान गीत बंधन जाके जाके रहय देव दान मोने छाके छाके भोम बीवान आत्म उपदेश उपे सुसंयम को जाप सो अजपा जापी सदा रहय कंचन सी तोहि परबोध न ਲਾਗੋ चिञ्चत कहाँ परे बिखयन कह कबहु बिखए रासती यागो केवल कर्म परम सेची न हो धर्म कर्म अनुरागो संग्रह करो सदा सिमरन को परम पापता जे भागो जाते दुख पाप न पीटे काल जाल ते तागो जौ सुख चाहो सदा सवन को तौ हरि के रस पागो सो रठे पाठ सही प्रभु तो कह लाज हमारी नीलकंठ नर हरि नारायण नील वसन बनवारी रहौ परम पुरुष परमेश्वर स्वामी ਪਾਵਨ पावन ਅਹਾਰੀ माधव महाज्योति मद मर्दन मान मुकुंद मुरारी निर्विकार निर्जुनindra बिन निर्विख नरक निवारि कृपासिंध काल तिरुदर्सी कुकृत प्रणाशनकारी तनु रिपान त्रतमान तरातर अनविकार असतारी हाओ मातेमंद चरण शरणागत कर गहे लियो उवारी राग कल्याण पाद सही दशमी बिन करतार न कीर्तम मानो आदयजोन अजय अविनाशी ते परमेश्वर जानो ਕਹਾਂ ਪਹਿਉ ਜੋ ਆਨੇ ਜਗਤ ਮੈਂ ਦਾਸ ਕੋ ਅਸੁਰ ਹਰਿ ਕਾਏ ਹਰ ਇੱਕ ਪਰਪੰਚ ਦਿਖਾਏ ਸਵਨ ਕਾ ਆਪਹਿ ਬ੍ਰਹਮ ਕਹਾਏ ਪੰਜਨ ਗर्ण ਸਮਰੱਥਾ ਦਾ ਪ੍ਰਭ ਸੋ ਕਿਮ ਜਾ ਤਿਗਨਾਇਉ ਤਾਂ ਤੇ ਸਰਵ ਕਾਲ ਕੇ ਆਸ ਕੋ ਬਚਾਏ ਨ ਆਇਉ ਕੈਸੀ ਤੂੰ ਹਿਤਾਰੇ ਹੈ ਸੁਨ ਜੜ ਆਪ ਡੁੱਬਿਓ ਭਵ ਸਾਗਰ ਛੁਟਹੁ ਕਾਲ ਫਾਸਤੇ ਤਵੀ ਗਹੋ ਸਰਨੇ ਜਗਤਾ ਗਿਰਖੀ ਆਲ ਪਾਤ ਸਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ ਤੋਦ ਵੀਨ ਰੋਗ ਰਜਾਂ ਜਾਂਦਾ ਉਡਣ नाग ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਟਖੇੜੀ ਅੰਦਰਣ ਤਲੰਕਾ ਫੀ ਪਾਤ ਸਹੀ केवल का लय करतार आदे अंत अनंत मूरते गर्ण भंजन हारौ हा। निंद उसत जौन के सम सतर मित्र न कोई कौन बाट परितसै पद सादसी रात होई तात मात न जात जाकर पुत्र पौत्र मुकंद कौन काज कहायगे जग आन देवक नंद देव दैत दिशा विसा जहकीन जग सर्व प्रसार اونو مان ਤਾਨੂੰ ਕੋ ਮੁਖ ਲੇਤ ਨਾਮ मुरार राग बेलावल पाच 100 ਕਿ ਮਾਨ ਸਰੂਪ ਕਹਾਈ ਸਿੱਧੇ ਸਮਾ ਦੇ ਸਾਦੇ ਕਰੇ ਹਾਰੇ ਕਿਹੂ ਨ ਦੇਖਨ ਪਾਏ ਰਹਾਉ ਨਾਰਦ ਵਿਆਸ ਬਰਾਸਰਤੂੰ세 ਤੇ ਆਵਤਿ ਹੰਦ ਪੁਰਾਨ ਹਾਰੇ ਹਟ ਆਏ দানਵ ਦੇਵ ਪਿ사ਜ ਪਰੇ ਨੇਤਾ ਨੇਤ ਕਹਾਈ ਸੂਸ਼ਮ ਤੇ ਸੂਸ਼ਮ ਕਰ ਚੀਨੇ ਮਿਰਦ ਮਿਰਦ ਬਤਾਏ भूमिय का अस्पताल सब ऐसा जी एक नेक सदाए सोनर काल फांस ते वाचे जो हरि सारे ने सदाए देवगंधारी 56.1 भिन्न दूसर सो नाचे नार पंजन गणन समरथ सदा प्रजान्त है करता रहौ कहां ਤਾ ਮੈਂ ਕਹਾਂ ਸਿੱਧ ਹੈ ਰੀ ਜੜ ਤੋ ਹੀ ਕਹਾਂ ਹੈ ਜਾਓ ਜਿਹ ਹੂਤ ਦੇਤ ਕਛ ਤੋਈ ਕਰ ਕਰਮ ਵਿਚਾਰ ਕੇਵਲ ਏਕ ਸਰਣ ਸਵਾਮੀ ਬਿਨ ਯਾਉ ਨ ਕਤੈ ਉਹ ਵਾਰ ਦੇਵ ਗੰਧਾਰੀ ਪਾਦ ਦਸਵੀਂ ਬੇਨ ਹਾਰੇ ਨਾਮ ਨ ਹੈ 14 ਲੋਕ ਜਾ ਹੈ ਤਾਤੇ ਕਹਾਂ ਪਲਾ ਹੈ रहाऊ राम रहीम उबार न साख जाकर नाम रटह ब्रह्मा विष्णु रुद्र सूरज सास्ते वासिकाल सबह वेद पुराण कुरान सबह मत जाकर नीत कहे है इंद्र फनिंद्र मुनिंद्र कल बहुत ही आवत यहां न ए है जा कह रूप रंग न जानत सो